शलोक अनेक लीला राज रस रूपं छत्र चमर तखत आसनं रचंत मूड अज्ञान अंध नानक सुपन मनोरथ माया ये लीला हुंदी है अपनी मर्जी ना चलना जिदे मर्जी यार प्रकार दी पूरी हुंदी होवे उ बड़ा रस आउंदा बाल मरे बालक की लीला ਜੇ ਮਾਨਾ ਆਪਣੀ ਲੀਲਾ ਵਾਲਕ ਆਪਣੀ ਲੀਲਾ ਅਨਸਾਰ ਚੱਲੇ ਤਾਂ ਸਮਝੋ ਦੀ ਮੌਤ ਹੈ ਆਪਣੇ ਪਾਣੀ ਚੱਲਣਾ ਦੀ ਮੌਤ ਹੈ ਜਿਹੜਾ ਆਪਣੀ ਮਰਜ਼ੀ ਨਾਲ ਚੱਲਣਾ ਹੈ ਉਹਦੇ ਵਿੱਚ ਜਿਹੜਾ ਰਸ ਹੁੰਦਾ ਹੀ ਆਉਂਦਾ ਰਾਜ ਰਾਜ ਰਾਜਾ ਹੋ ਗਏ ਕਿ ਰਾਜ ਰਾਸ ਹੈ ਆਪਣੀ ਅਗਰ ਚੱਲਣ ਸਾਰੇ ਰਾਜ ਰਾਸ ਹੈ ਰੂਪ ਦਾ ਵੀ ਰਾਸ ਹੈ ਰੂਪ ਵੀ ਉਹਨੇ ਕੋਲ ਹਰ ਪ੍ਰਕਾਰ ਦਾ ਨਾ ਕੋਈ ਜੀਰੇ ਮੋਤੀ ਸਾਰੇ ਜੋ ਕੋਈ ਚੀਜ਼ ਲੱਗਦੀ ਆ ਉਹ ਹਾਸਲ ਕਰ ਲੈਂਦਾ ਕੋਈ ਘੋੜਾ ਹੋਵੇ ਕੁਝ ਵੀ ਹੋਵੇ ਚਾਹੇ ਬੜੇ ਬੜੇ ਮਨ ਪਸੰਦ ਹੋਵੇ ਕੋਈ ਉਹਦੇ ਆਗਿਆ ਤੋਂ ਬਾਹਰ ਨਾ ਹੋਵੇ ਅਰੇ ਚੰਤ ਗੂੜ ਅਵਿਆਨੰਦ ਇਹ ਮੂਰਖ ਬਣ ਕੇ ਨਾਲ ਰਿਖਾ ਹੋਇਆ ਹੋਵੇ ਆਪਣੇ ਮੂਰਖ ਦਾ ਗਿਆਨ ਨਾ ਹੋਵੇ ਪਾਇਆ ਗਈ ਲੈ ਕੇ ਰੱਖਿਆ ਹੋਵੇ ਨਾਨਕ ਸੁਪਨਾ ਮਨੋਰਤ ਮਾਇਆ ਹੈ ਮਾਇਆ ਜਿਹੜੀ ਸੁਪਨੇ ਮਨੋਰਤ ਹੈ ਉਹਦਾ ਰਾਜ ਹੈ ਥੋੜੀ ਦਾ ਰਾਜ ਜਿਹਨਾਂ ਰਾਜ ਨਹੀਂ ਹੈ ਉਹਦਾ ਰਾਜ ਜਿਹੜਾ ਹੁੰਦਾ ਉਹ ਸਦੀਵੀ ਹੁੰਦਾ ਹਰਾਂ ਕੀ ਰਾਜ ਹੁੰਦਾ ਇਹ ਫਰਕ ਹੈ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹੋ ਨਾਨਕ ਨਾਮ ਵੀ ਹੋਣਿਆ ਸੁੰਦਰ ਮਾਇਆ ਤ੍ਰੋ ਉਹ ਤਾਂ ਦੇ ਵਿੱਚ ਸਾਰੇ ਰੰਗ ਨੇ ਉਹਨੇ ਰਾਜੇ ਨੇ ਪਰ ਉਹ ਬੜਾ ਮਿੱਠਾ ਲੱਗਿਆ ਲੱਗਦਾ ਪੱਲਾ ਨਾਨਕ ਨਾਮ ਵੀ ਹੋਣਿਆ ਸੁੰਦਰ ਮਾਇਆ ਤ੍ਰੋ ਸੁੰਦਰੀ ਜਿਹੜੀ ਸੁੰਦਰੀ ਮਾਇਆ ਤ੍ਰੋ ਹੈ ਸੁੰਦਰੀਆਂ ਆ ਜਿਹੜੀਆਂ ਇਸੀਆਂ ਨਾਲ ਉਹਦਾ ਵੰਨ ਕਰ ਗਿਆ ਹੋਇਆ ਉਹਦਾ ਮਾਨ ਹੈ ਉਹਦੇ ਨਾਲ ਧਰੋ ਕੀਤਾ ਉਹ ਨੂੰ ਨਹੀਂ ਸਮਝ ਆਈ ਕਿ ਉਹਦੇ ਨਾਲ ਧਰੋ ਕੀਤਾ ਮਾਇਆ ਨੇ ਤੇ ਕੀਤਾ ਤੇ ਉਹ ਦਿੱਤਾ ਮਾਇਆ ਨੇ ਸਭ ਕੀਤਾ ਵੀ ਪੈਦਾ ਕੀਤਾ ਕਿ ਹੈ ਤੇਰੇ ਨਾਲ ਤਾਂ ਧਰੋ ਹੋ ਗਿਆ ਮਾਇਆ ਨੇ ਤੇ ਮਾਇਆ ਤੇਰੀ ਹੈ ਤੈਨੂੰ એનਰਜੀ ਕਿਸ ਪਾ ਰਹੀ ਹੈ ਜੋ ਆਪਣਾ ਆਦਮੀ ਹੋਵੇ ਤੁਹਾਨੂੰ ਖਾਨ ਕਰੇ ਉਹਨੂੰ ਧਰੋ ਕੇ ਇਹਦਾ ਅੱਖ ਵੀ ਨਹੀਂ ਰਹਿਣ ਦਿੱਤਾ ਮਾਇਆ ਨੇ। ਤੇਰੀ ਸੁਪਨੇ ਛੇਤੀ ਚਿਤ ਮੂਰਖ ਲਾਇਆ ਰਾਜ ਰਸ ਭੋਗ ਜਾਗਤ ਭਖਲਾਇਆ। ਸੁਪਨੇ ਛੇਤੀ ਚਿਤ ਮੂਰਖ ਲਾਇਆ ਮੂਰਖ ਨੇ ਸੁਪਨੇ ਨਾਲ ਚਿਤ ਲਾਇਆ ਹੋਇਆ। ਉਹ ਸੁਪਨੇ ਨਾਲ ਹੀ ਚਿਤ ਲਾਈਦਾ ਹੁੰਦਾ। ਰਾਜ ਕਰ ਰਿਹਾ ਸੁਪਨੇ। ਉਹ ਰਿਹਾ ਉਹਦੇ ਨਾਲ ਉਹ ਕਹ ਰਿਹਾ ਹਾਂ ਮੈਂ ਰਾਜੇ ਕਰ ਰਿਹਾ। ਚਿਤ ਲਾਇਆ ਹੈ। ਰਾਜ ਰਸ ਭੋਗ ਜਾਜ਼ਤ ਜਦ ਜਮਕਾ ਡੰਡ ਬੋਡ ਲੱਗਦਾ ਫਿਰ ਭਗਵਾਇਆ ਫਿਰ ਬੁਖਾਰ ਆ ਇਹਨੂੰ ਜੇਤਾ ਹੁਣ ਫਿਰ ਵਰਣਾ ਕੁਝ ਜਾਗੂਗਾ ਜਾਂ ਸੁਪਨੋ ਕੋ ਫਿਰ ਪਖਲਾਉਂ ਖਲਾ ਜਾਂਦਾ ਇਹ ਕੀ ਹੋ ਗਿਆ ਸਾਰਾ ਸੁਪਨਾ ਹੀ ਸੀ ਮੈਂ ਤਾਂ ਐਨੇ ਕੁਝ ਹੋਇਆ ਫਿਰ ਸਾਡੀ ਹਾਂਜੀ ਪਖਲਾ ਹੁੰਦਾ ਜੀ ਬਰੜਾਉਣਾ ਬੁਖਾਰ ਜਾਣਾ ਫਰਾਨ ਹੋ ਜਾਣਾ ਦਰ ਜਾਣਾ ਜੇ ਨਹੀਂ ਨੁਕਸਾਨ ਜਾਂਦਾ ਹੋ ਜਾਣਾ ਉਹਦਾ ਨੁਕਸਾਨ ਦਾ ਪਤਾ ਲੱਗੂਗਾ ਤੈਨੂੰ ਮਾਇਆ ਦਾ ਧੋ ਦਾ ਗਿਆਨ ਹੋਊਗਾ ਜਾਗੇ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਆਰ ਜਾ ਗਈ ਵਿਹਾਈ ਉਮਰ ਸਾਰੀ ਚਲੀ ਗਈ ਹਾਂਜੀ ਧੰਦੇਆਂ ਦੇ ਵਿੱਚ ਧਰਮ ਦਾ ਕੀਟਾ ਨਹੀਂ ਧੰਦੇ 'ਚ ਲੱਗਿਆ ਰਹਾ ਉਹ ਧੰਦੇ ਦੀ ਕਮਾਈ ਤਾਂ ਇੱਥੇ ਰਹਿ ਜਾਣੀ ਤੰਦੇ ਜਿਤ ਭੱਜਿਆ ਫਿਰਦਾ ਰਿਹਾ ਔਰ ਸਾਰੀ ਉਹ ਕਾਮ ਹੋਇਆ ਮਾਇਆ ਕੋਈ ਜਿਹੜਾ ਕੰਮ ਕਰਨਾ ਆਇਆ ਤਾਂ ਉਹ ਪੂਰਾ ਹੋਇਆ ਹੀ ਨਹੀਂ ਮਾਇਆ ਦੇ ਮੋਜੇਫ ਹੋ ਗਿਆ ਰਹਿ ਗਿਆ ਆਇਆ ਨੇ ਐਸਾ ਮੋਇਆ ਕੀਤਾ ਹੋਇਆ ਹੀ ਨਹੀਂ ਪੂਰਾ ਹੋਇਆ ਹੀ ਨਹੀਂ ਚੜੀ ਆਈ ਹਾਂਜੀ ਜੰਤ ਆਪ ਭੁਲਾਇਆ ਕਿ ਜੰਤ ਕਹਿੰਦਾ ਆਪਣੇ ਆਪ ਨੂੰ ਚਾਹ ਕਿੰਨਾ ਹੀ ਖੱਬੂ ਖਾਨ ਸਮਝਦਾ ਹੋਵੇ ਕਿੰਨਾ ਕਿਆਣਾ ਸਮਝਦਾ ਹੋਵੇ ਕਿੱਡਾ ਹੀ ਗੁਰੂ ਬਣਿਆ ਹੋਵੇ ਇਹ ਕਹਿੰਦੇ ਜਨ ਜ ਆਪਣੇ ਆਪਣੇ ਆਪ ਬਣਿਆ ਫਿਰਦਾ ਖੁੰਨੀ ਬੁੱਤ ਬਣੀ ਫਿਰਦੀ ਹੈ ਵੀ ਮੇਰੇ ਵਰਗਾ ਕੋਈ ਅਕਲਮੰਦ ਹੈ ਦੀ ਇਹ ਮੂਰਖਾ ਆਪਣੇ ਆਪ ਨੂੰ ਮੰਨੀ ਬੈਠਾ ਹਾਂਜੀ ਇੱਥੇ 8ਵੀਂ ਪੌੜੀ ਸਮਾਪਤੀ ਜੀ